शलोक ਲੋਕ तीजा, अमर ਅਮਰ ਵੇ ਪ੍ਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੈ ਮਨ ਲਏ ਰਸਾਈ ਸਤਿਗੁਰ ਦਾ ਅਮਰ ਹੈ ਵੇ ਪ੍ਰਵਾਹ ਹੈ ਉਹ ਲਾਪਰਵਾਹੀ ਹੈ ਵੇ ਪ੍ਰਵਾਹ ਹੈ ਵੇ ਪ੍ਰਵਾਹ ਹੁੰਦਾ ਜਿਹੜਾ ਬਖਸ਼ ਦਵੇ ਉਸ ਨਾਲ ਸਰੇ ਮਨੇ ਜੇ ਚਾੜਨਾ ਆਇਆ ਤੇ ਕੰਟਰੋਲ ਆਇਆ ਉਹ ਬੇਪਰਵਾ ਉਹਨੇ ਪਰਵਾਹ ਨਹੀਂ ਕਰਦਾ ਵੀ ਕੇ ਆਇਆ ਆ ਉਹ ਕਿਹਾ ਕਿ ਗਲਤੀਆਂ ਕੀਤੀਆਂ ਨੇ ਨਾ ਨਾ ਉਹ ਬੇਪਰਵਾ ਹੈ ਉਹਦੇ ਨਾਲ ਕਿਸ ਨਾਲ ਸਿਆਣਪ ਚੱਲੀ ਉਹਦੇ ਨਾਲ ਸਿਆਣਪ ਨਹੀਂ ਚੱਲਦੀ ਬੇਪਰਵਾ ਜ਼ਰੂਰ ਹੈ ਪਰ ਚਲਾਕੀ ਵੀ ਚੱਲ ਸਕਦੀ ਉਹਦੇ ਨਾਲ ਨਾ ਹੁਜਤ ਚੱਲ ਸਕਦੀ ਹੈ ਨਾ ਹੁਜਤ ਕਰ ਲਈ ਜਾਏ ਉਹਨਾਂ ਨੂੰ ਹੁਜਜ ਕਰਨੀ ਚਾਹੀਦੀ ਹੈ ਸਿਆਣਪ ਉਹਨਾਂ ਚੱਲਣੀ ਹੈ ਆਪਣੀ ਸਿਆਣਪ ਨੂੰ ਹੁਜਜ ਹੁਜਜ ਦਾ ਅਫਰਾਦ ਹੈ ਇੱਕ ਸੁਣਾ ਜਿਹੜੇ ਹੁਜਜ ਕਰਦੇ ਨੇ ਬੜੇ ਲੇਖੇ ਨਾ ਉਹਰੇ ਪਾਸ ਨੂੰ ਕਾਲ ਮਾਰ ਦੇ ਲਈ ਵਿਚਾਰ ਨੂੰ ਬੈਸ ਦਾ ਵੇਸ਼ਾ ਬਣਾ ਲੈਣ ਤੇ ਹੁਜਜ ਧਰਮ ਹੈ ਵਿਚਾਰ ਦਾ ਵੇਸ਼ਾ ਇਹਨੂੰ ਬੈਸ ਦਾ ਵੇਸ਼ਾ ਬਣਾ ਦੇਣ ਵਿਦਵਾਨਾਂ ਨੇ ਜਿਹੜੇ ਬੈਸ ਪਾ ਤਾਂ ਕਿ ਮੇਡੀ ਬੈਠੀ ਰਹੋ ਆਪਣੀ ਔਰ ਬਚਾਉਣ ਵਾਸਤੇ ਮਨਣੀ ਦੀ ਹੈ ਗੱਲ ਉਹ ਜੱਟ ਕਹਿੰਦੇ ਨੇ ਮਨ ਹਰਾਮੀ ਕੁਝ ਤਾਂ ਢੇਰ ਮਨ ਹਰਾਮੀ ਹੋਇਆ ਨਾ ਹੋਇਤਾ ਤਾਂ ਕਾਟਾ ਕੋਈ ਨਹੀਂ ਹੈ ਆਪ ਛੋੜ ਸਲਣਾਏ ਪਤਾ ਹੈ ਉਹ ਆਪਣਾ ਬੁੱਧੀ ਦਾ ਜਿਹੜਾ ਹੈ ਨਾ ਆਪਣੀ ਜਿਹੜੀ ਤੁਸੀਂ ਫੈਸਲੇ ਲੈ ਲੇ ਜੋ ਵੀ ਪਿੱਛੇ ਪੜ ਲਿਆ ਜੋ ਗਲਤ ਹੈ ਉਹ ਛੱਡ ਦੋ ਤਿਆਗ ਦੋ ਮਨ ਲੈ ਰਜ਼ਾਏ ਗੁਰੂ ਦਾ ਭਾਣਾ ਗਦੇ ਪਰਮੇਸ਼ਰ ਦੀ ਰਜ਼ਾ ਨੂੰ ਗਦੇ ਆਪਣਾ ਭਾਵਨਾ ਛੱਡ ਕੇ ਸਰਬੀਛਲ ਦੇ ਭਾਣੇ ਚ ਆ ਜਵੇ ਇਹੀ ਗੁਰਬਾਣੀ ਕਹਿੰਦੀ ਹੈ ਆਪਣੀ ਗੱਲ ਦਾ ਕੋਈ ਵੀ ਨਹੀਂ ਮੇ ਨਾਲ ਰਹਾ ਕੋਈ ਭਗਤ ਉਹ ਤਾਂ ਰਜ਼ਾ ਦੇ ਨਾ ਲੱਗਈ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਈ ਗੁਰਮਤਿ ਜੰਮ ਡੰਡ ਨਾ ਲੱਲੀ ਗੁਰਪ੍ਰਭੂ ਜੀ ਡੰਡ ਲੱਗਦਾ ਇਹਦੀ ਜਾਏ ਤੋਂ ਦੇ ਹੰਕਾਰ ਦੀ ਹੁੰਦਾ ਹੰਕਾਰ ਤੇ ਹੀ ਪ੍ਰਹਾਰ ਕਰਦਾ ਹੈ ਉਹ ਜਿੱਤੇ ਹੰਕਾਰ ਦੀ ਉਹ ਤੇ ਪ੍ਰਹਾਰ ਦੀ ਲੋੜ ਨਹੀਂ ਕੋਈ ਨਾ ਜੇ ਕੋਈ ਰਾਜੇ ਤੇ ਮੂਰੇ ਅੜਦਾ ਹੈ ਉਸੇ ਨਾਲ ਉਹ ਜੇ ਪਹਿਲਾਂ ਹੀ ਸ਼ੈਲਟ ਚਲਾ ਗਿਆ ਤਾਂ ਉਹਦੇ ਨਾਲ ਲੜਾਈ ਦਾ ਮਤਲਬ ਹੀ ਜਾਂਦਾ ਕੋਈ ਨਾਨਕ ਤੇਮ ਕੋ ਸੋਈ ਭਾਵੇਂ ਜੇ ਸੱਚ ਰਹੇ ਲਗ ਲਾਈ ਛੇ ਕੋਣ ਜੇ ਸੱਚ ਨਾਲ ਲਗ ਲੱਗੀ ਹੋਈ ਹੈ ਜੀ ਵੀ ਅੰਦਰ ਹੈ ਬਾਹਰ ਨਹੀਂ ਹੈ ਸੱਚ ਤੇਰੇ ਕੁੜੀ ਚ ਸੱਚ ਨਹੀਂ ਹੁੰਦਾ ਤੇਰੇ ਕੁੜੀ ਸ਼ੈਤਾਨ ਦਾ ਘਰ ਹੈ ਸ਼ੈਤਾਨ ਕੋਲ ਸੱਚ ਕਿੱਥੇ ਜੇ ਸ਼ੈਤਾਨ ਜੇ ਛੱਡ ਗੱਲਾਂ ਸ਼ੈਤਾਨ ਛੱਡ ਕੇ ਲਾਲ ਮੈਂ ਆਤਮਾ ਦੇ ਸਰਚਾ ਦੇ ਉਹਨੂੰ ਜਦੋਂ ਦਾ ਸੱਚ ਰਹੇ ਲਿਵ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹਉਮੈ ਮੇਰੀ ਦਾਤ ਜਿਹੜੀ ਤੇ ਤੋਂ ਮਿਲਦੀ ਏ ਬਖਸ਼ ਨਾਮ ਦੀ ਇਹ ਜੋਤ ਜਿਹੜੀ ਸਾਨੂੰ ਬੁੱਧੀ ਮਿਲਦੀ ਏ ਹੋਰ ਫਕਤ ਮਤਲਬ ਸਾਡੇ ਅੰਦਰ ਚੱਲਣ ਹੁਣ ਸਭ ਸੂਰਤ ਤੇਰੀ ਏ ਤੇਰੀ ਸੂਰਤ ਏ ਇਹ ਸੂਰਤ ਏ ਤੇਰੀ ਤੇ ਨਾਮ ਗਿਆਨ ਦਿੱਤਾ ਜੋ ਬੁੱਧੀ ਦਿੱਤੀ ਏ ਇਹ ਤੇਰੀ ਸੂਰਤ ਈ ਏ ਬਹੁਤ ਗਿਆਨਪੂਰਬੇ ਮੇਰੀ ਜਿਹੜੀ ਬਹੁਤ ਸਿਆਣਾ ਮੈਂ ਬਹੁਤਾ ਸਿਆਣਾ ਬਣਦਾ ਉਹ ਮੇਰੀ ਹੋਂਮੇ ਆ ਇਹ ਤਾਂ ਮੇਰੀ ਮਤ ਥੋੜੀ ਰਾਮ ਤੂੰ ਜ਼ਬਰਦਸਤ ਬਟਾ ਇਹ ਕਹਿੰਦਾ ਜਿਹੜੀ ਐਸ ਵਕਤ ਬੁੱਧੀ ਆ ਉਹ ਮੇਰੀ ਨੀ ਤੇਰੀ ਹੈ ਜਿਹੜਾ ਐਸ ਵਕਤ ਮੇਰਾ ਨਹੀਂ ਤੇਰੀ ਦਾਤ ਹੈ ਲੇਕਿਨ ਵਿਦਵਾਨ ਨਹੀਂ ਇਹ ਗੱਲ ਬੋਲਦੇ ਹੁਰਮਾ ਕਹੇ ਗੱਲ ਬੋਲਦੇ ਇਹ ਜਾਂਦੇ ਵੀ ਹੈ ਬਹੁਤ ਸਿਆਣਾ ਜਿਹੜੀ ਹੈ ਉਹ ਮੇਰੀ ਰੋਮੇ ਜਿਹੜੇ ਬਹੁਤ ਸਿਆਣਾ ਆਪਣੇ ਆਪ ਨੂੰ ਵਧਦੋ ਕਹਦਾ ਹੋ ਹਾਂਜੀ ਬਹੁਤ ਕਰਮ ਕਮਾਵੇ ਲੋਭੀ ਮੋਹ ਵੀ ਆਪੇ ਕਦੇ ਨਾ ਚੁੱਕੇ ਫੇਰੀ ਕਰਮ ਕਾਂਜ ਹਾਂ ਲੋਭ ਵਿੱਚ ਉਹਨਾਂ ਕਦੇ ਨਾ ਚੁੱਕੇ ਫੇਰੀ ਕਾਰ ਤਾ ਉਹਨਾਂ ਦੇ ਦਰੋਂ ਕਦੇ ਪਰੇ ਦੂਰ ਹੁੰਦਾ ਹੀ ਨਹੀਂ ਹਰ ਬਖਤ ਹੰਕਾਰ ਹਾਜ਼ਰ ਰਹਿੰਦਾ ਉਹਨਾਂ ਦੇ ਉੱਤੇ ਇਹ ਫੇਰੀ ਕਦੇ ਪਰੇ ਲੋਭਵਾਰ ਬਹੁਤ ਆ ਕਦੇ ਪਰੇ ਭਾਵੇਂ ਹੋ ਜਿਵੇਂ ਹੋ ਗਈ ਪਰੇ ਹੁੰਦੀ ਕਦੇ ਵੀ ਹਮਾਗਾ ਰਾਜ ਨਹੀਂ ਹੁੰਦੀ ਵਗੈਰਾ ਜਰਦੀ ਹੁੰਦੀ ਉਹ ਪਰ ਲੋਭ ਕਰਕੇ ਕਹਿ ਰਹੇ ਹਾਂ ਜੇ ਬੀ ਹੋ ਸਕਦਾ ਹੈ ਕਈ ਗੱਲਾਂ ਐ ਜਿਹੜੀਆਂ ਕਰਦੇ ਰਹੇ ਹੋ ਗਿਆਨ ਦੀਆਂ ਜਿਹੜੀਆਂ ਹੋਰ ਮਤਾਂ ਨੇ ਉਹ ਲੋਭਰ ਮੋਤਾ ਤੇ ਤਖਰਾ ਭੁੱਲ ਜਾਂਦੇ ਨੇ ਹਕੂਮਤ ਕੁਝ ਹਮੇ ਦਾਤਾ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਤੋਂ ਵੀ ਉਹ ਵਾਲੀ ਗੱਲ ਐ ਜੀ ਨਾ ਪੁੱਝਣ ਵਾਲੀ ਗੱਲ ਐ ਐਵੇਂ ਹਮੇ ਪੁੱਝਣ ਵਾਲੀ ਗੱਲ ਨਹੀਂ ਉਹ ਕੋਈ ਪੁੱਝਾ ਤਾਂ ਸੂਝਾ ਨਾਮ ਦਾ ਰਹੇ ਨਾ ਵਿਰੋਧ ਹੈ ਦੋੋਂ ਦਾ ਨਾਮ ਨਾਲ ਵਿਰੋਧ ਹੈ ਦੋਏ ਕੁੱਝਣ ਵਾਲੀ ਚੀਜ਼ਾਂ ਨੇ ਲੋਭ ਦਾ ਪਤਾ ਲੱਗਦਾ ਮੋਹ ਦਾ ਪਤਾ ਲੱਗਦਾ ਹੋਪੇ ਦਾ ਨਹੀਂ ਪਤਾ ਲੱਗਦਾ ਹਮੇ ਗੱਲ ਚੰਗੇਰੀ ਨਾਨਕ ਆਪ ਕਰਾਇ ਕਰਤਾ ਕਰਤਾ ਆਪ ਕਰ ਹੁੰਦਾ ਜੋਤੀਸ ਭਾਵੈ ਸਾਈ ਗੱਲ ਚੰਗੇਰੀ ਜੋ ਚੰਗਾ ਲੱਗਦਾ ਉਹੀ ਗੱਲ ਚੰਗੀ ਆ ਜਿਨਾ ਜਿਹੜਾ ਅਸਲ ਦੇ ਵਿੱਚ ਅੰਤਰਾ ਸਰ ਲਾਡੀ ਦੇ ਕੋਈ ਫੈਸਲਾ ਨਾਲ ਦੇ ਦਿੱਤਾ ਉਹਨਾਂ ਚਰ ਮਨੁੱਖ ਦੇ ਵੀ ਫੈਸਲਾ ਅਧੂਰੇ ਹੀ ਰਹਿੰਦੇ ਨੇ ਜੋ ਕੁਝ ਪ੍ਰੈਕਟੀਕਲ ਹੁੰਦਾ ਉਹਦੇ ਪੜੀ ਜੁਦਦਾ ਸੋਚਣ ਨੂੰ ਅਸੀਂ ਇੰਡੀਪੈਂਡੈਂਟ ਹੈਗੇ ਹੀ ਸੋਚੋ ਗੁਰਜੀ ਸਕਦੇ ਆ ਘਰ ਕੁਝ ਨਹੀਂ ਸਕਦੇ ਅੱਜ ਖਾਣਾ ਸੱਚ ਪਹਿਨਣ ਦੇਖੋ ਹੁਣ ਖਾਣਾ ਪਹਿਨਣਾ ਕੀ ਹੈ ਕੀਦਾ ਬੁਰਕਾ ਸੱਚ ਜੇ ਉਹੀ ਸੱਚ ਮਨ ਦਾ ਖਾਣਾ ਹੋ ਜਾ ਸੱਚ ਪਹਿਨਣ ਤੇ ਉਹ ਬਾਕੀ ਜਿਹੜਾ ਦੁਆ ਮਾਇਆ ਦਾ ਖਾਣਾ ਸਰੀਰ ਨੇ ਖਾਂਦਾ ਇੱਥੇ ਆ ਕੇ ਫਰਕ ਪੱਡੂ ਅੱਡੋ ਸੱਚ ਖਾਣਾ ਸੱਚ ਪਹਿਨਣ ਸੱਚ ਨਾਮ ਦਾ ਸੱਚ ਨਾਮ ਦਾ ਹੀ ਅਧਾਰ ਹੈ ਸੱਚ ਨੂੰ ਕੀ ਹੋਉ ਤੋਂ ਹਕਮ ਦਾ ਅਸਰਾ ਸੱਚ ਖਾਣਾ ਸੱਚ ਪਹਿਨਣ ਸਾਚਨਾ ਆਧਾਰ ਗੁਰਪੂਰੇ ਮੇ ਲਾਇਆ ਪ੍ਰਭ ਦੇ ਗੁਣ ਦਾ ਪੂਰੇ ਗਿਆਨ ਤੇ ਪੂਰੇ ਗੁਰ ਤੇ ਪੂਰੇ ਸਤਗੁਰ ਮਿਲਿਆ ਉਹ ਤਾਂ ਪੂਰਾ ਗਿਆਨ ਮਿਲਿਆ ਤਾਂ ਇੱਕ ਹੋਇਆ ਮਿਲ ਆਇਆ ਪ੍ਰਭ ਪ੍ਰਭ ਹੈ ਸਤਗੁਰ ਦੇਵਨ ਹਾਲ ਦੇਵਨ ਹਾਲ ਦਾ ਪ੍ਰਭ ਹੈ ਹੁਣ ਜਿਹੜਾ ਬੋਲ ਰਿਹਾ ਹੁਣ ਸਤਗੁਰ ਦੀ ਬਾਣੀ ਹੈ ਤਾਂ ਕਿ ਪ੍ਰਭ ਹੁਣ ਅੱਗੇ ਹੀ ਹੁਕਮੇ ਆਉਗਾ ਦੂਜੀ ਸਟੇਜ ਅੰਦਰ ਵਿੱਚ ਜਾ ਕੇ ਜਦ ਬੋਲੀ ਜਾਂਦੀ ਹੈ ਤੋਕ ਤੋਂ ਬਾਹਰ ਦੀ ਜਿਹੜੀ ਆਵਾਜ਼ ਹੈ ਦੋ ਪਦਾਰਥਾਂ ਤੋਂ ਬਾਹਰ ਦੀ ਉਹਦੇ ਜਾ ਕੇ ਪਰ ਫਿਰ ਹੋ ਗਾਹ ਬਣ ਜਾਂਦੇ ਹੋ ਕਮ ਬਣ ਜਾਂਦੇ ਦੋ ਪਦਾਰਥਾਂ ਤੋਂ ਪਹਿਲਾਂ ਦਾ ਹੈ ਉਹ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਉਹਨਾਂ ਦੇ ਪੂਰੇ ਭਾਗ ਸੀ ਜਿਹੜੇ ਜਾਗਿਆ ਜਿਹਨਾਂ ਦੀ ਜਾਗਰਤਾ ਵਾ ਜਿਹਨੂੰ ਸਮਝ ਆ ਗਈ ਜਿਨ੍ਹਾਂ ਨੇ ਵੰਡ ਲਈ ਗੁਰਬਾਣੀ ਜਾਗਣ ਨਾਲ ਗੁਰਬਾਣੀ ਬਦਲੀ ਜਪਿਆ ਅਨੰਕਾਰ ਉਹਨੂੰ ਕਾਡੂ ਜਾਣ ਲਿਆ ਦੁਨਕਾਰ ਕੌਣ ਹੈ ਨਾਂਕਾਰ ਕੌਣ ਹੈ ਨਾਂਕਾਰ ਆਪੇ ਬਣ ਜਾਣਾ ਨੇ ਦੇਰਾਕਾਰ ਹੈ ਮਨ ਵੀ ਇਹਦਾ ਬੂੜ ਵੀ ਨਰਾਕਾਰ ਹੈ ਬੁੱਧੀ ਵੀ ਨਰਾਕਾਰ ਹੈ ਜਪਿਆ ਇਹ ਸਮਝ ਲਿਆ ਉਹਨੇ ਪਹਿਲਾਂ ਤਾਂ ਜੋ ਮੂਰਤ ਹੋ ਗਿਆ ਦੇ ਵਿੱਚ ਆਪ खोजਿਆ ਜਿਹਦਾ ਮਾਨਾ ਉਹ ਖੋਜ ਲਿਆ ਜਪਿਆ ਅਨੰਕਾਰ ਨੰਕਾਰੂ ਜਾਣ ਲਿਆ ਜਪਣਾ ਮਤਲਬ ਜਾਣ ਲਿਆ ਜਪਿਆ ਅੰਕਾਰ ਸਾਧੂ ਸੰਤਤ ਲਗਿਆ ਕਰਿਆ ਸੰਸਾਰ ਆਪਣੇ ਤਰ ਗਿਆ ਦੀ ਸੰਤ ਦੇ ਸੰਗ ਜੁੜ ਕੇ ਸੰਤ ਕਰਕੇ ਕਰਤਾਰ ਸੰਸਾਰ ਛੱਡਦਾ ਤਿਰਕੁਣੀ ਛੁੱਟ ਗਈ ਤਿਰਕੁਣੀ ਛੁੱਟ ਗਈ ਸੰਸਾਰ ਤਰਿਆ ਗਿਆ ਹਾਂਜੀ ਨਾਨਕ ਸਿਫਤ ਸਲਾਹ ਕਰੀ ਪ੍ਰਭ ਕਾ ਜੈਕਾਰ ਨਾ ਫਿਰ ਸਤਿ ਸਲਾਹ ਇੱਥੇ ਆ ਕੇ ਹੁੰਦੀ ਹੈ ਸਤਿ ਸਲਾਹ ਉਹ ਸਤਿ ਸਲਾਹ ਵੀ ਹੈ ਪ੍ਰਭ ਦਾ જયਕਾਰ ਆ ਗਿਆ જયਕਾਰ ਪ੍ਰਭ ਦੀ ਪ੍ਰਭ ਦਾ જયਕਾਰ ਉਹਦੀ ਸਤਿ ਸਲਾਹ ਵਾਹਿਗੁਰੂ ਨਾਮ ਨੇ જયਕਾਰ ਸ਼ਬਦ ਕਥਨ ਲਿਖਿਆ ਫਿਰ ਉਹ જયਕਾਰ ਸ਼ਬਦ ਕਥਨ ਕਹਿੰਦੇ ਉੱਥੇ ਉਹ ਸਤਿ ਸਲਾਹ ਕਹਿੰਦੇ જયਕਾਰ ਸ਼ਬਦ ਕਥਨ ਜੋ ਨਾ ਹੁਕਮ ਸਹੀ ਠੀਕ ਹੈ ਜੀ ਇੱਥੇ ਪੌੜੀ ਦੀ ਸਮਾਪਤੀ ਹੈ ਜੀ ਜੀ mm.